ਸ਼ਲੋਕ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਗੁਰ ਕਾ ਭਉ ਹੀਤ ਅਪਾਰ ਲੋਭ ਲਹਿਰ ਸੁਧ ਮਤ ਗਈ ਸੱਚ ਨ ਲੱਗੇ ਪਿਆਰ sheet prēm pur ke paane da prēm hai apna paana tyagta aur kitna het apaar het oh din oh het kitna kyuki apaar hai maya to to paar ho gayi hai het lagda hai maya to paar ho gayi het lagda hai maya unlimited hai wo unlimited hai wo da fir apaar hai ਬਾਰੇ ਗੱਲਾਂ ਆਉਂਦੇ ਲੋਭ ਲਹਿਰ ਜਿਹੜੀ ਲੋਭ ਲਹਿਰ ਅੰਦਰ ਪੈਦਾ ਹੋਈ ਜਾਂਦੀ ਲੋਭ ਤੋਂ ਹੀ ਲਹਿਰ ਪੈਦਾ ਹੁੰਦੀ ਲੋਭ ਲਹਿਰੇ ਆਹੋ ਜਿਹੜੀ ਤ੍ਰਿਸ਼ਨਾ ਜਿਹਨੂੰ ਕਹਿੰਦੇ ਆ ਲੋਭ ਲਹਿਰੇ ਆ ਸ਼ੁੱਧ ਮਤ ਗਈ ਜਿਹੜੀ ਸ਼ੁੱਧ ਮਤ ਲੈ ਕੇ ਆਇਆ ਸੀ ਜਦ ਬੇਲੇ ਸ਼ੁੱਧ ਘਰਚੇ ਪੇ ਜੀ ਅਸੀ ਸ਼ੁੱਧੇ ਹੀ ਦਾ ਕੋਈ ਬੱਚਾ ਹੁੰਦਾ ਤਾਂ ਮਤੋਂ ਦੀ ਸ਼ੁੱਧ ਹੋਦੀਏ ਉਹ ਚਲੀ ਗਈ ਸ਼ੁੱਧ ਮਤ ਗਈ ਸੱਚ ਨਾ ਲੱਗੇ ਪਿਆਰ ਇਸ ਕਰਕੇ ਸੱਚ ਵੀ ਪਿਆਰਾ ਲੱਗਦਾ ਸੀ ਉਹਨਾਂ ਜਿਹਨਾਂ ਦੇ ਲੋਭ ਲਾਇਆ ਗਿਆ ਉਹਦੀ ਸੁਧਤ ਬਾਤ ਨਾ ਹੋ ਜਾਂਦੀ ਹੈ ਸੱਚ ਉਹਨਾਂ ਨੂੰ ਡੂੜੀ ਜਿਹਾ ਲੱਗਦਾ ਸੱਚ ਜੇ ਜੱਫਾ ਲੱਗਦਾ ਤਾਂ ਮਾਇਆ ਦਾ ਮੂੰਹ ਪਹਿਲਾਂ ਵਿਸਾਰਿਆ ਹੋਇਆ ਹੋ ਪੈਂਦਾ ਫੇਰ ਉਹ ਗੁਰ ਕਾ ਹੈ ਜਾ ਰਹੇ ਆਪਣੀ ਹਿੱਤ ਵਿੱਚ ਲੱਗਦਾ ਔਰ અપਾਰ ਹਿੱਤ ਵਿੱਚ ਲੱਗਦਾ ਉਹਦੇ ਨਾਲ અપਾਰ ਪ੍ਰੇਮ ਪੈ ਜਾਂਦਾ ਉਹ ਆਪਣੀ ਹਿੱਤ ਵਿੱਚ ਜਿਹੜੀ ਗੱਲ ਹੁੰਦੀ ਹੈ ਉਹਦੇ ਨਾਲ ਪ੍ਰੇਮ ਹੈ ਜਿਹੜੀ ਆਪਣੇ ਖਿਲਾਫ ਉਹਦੇ ਨਾਲ ਪ੍ਰੇਮ ਦੀ ਹੁੰਦਾ। ਸਮਝ ਆ ਗਈ ਕਪੂ ਸੰਗੁਰ ਬਾਣੀ ਕਿ ਇਹਹੀ ਮੇਰੇ ਹਿੱਤ ਵਿੱਚ ਹੈ। ਮੇਰੇ ਹਿੱਤ ਵਿੱਚ ਜਜੋ ਗੁਰਬਾਣੀ ਕਹਿੰਦੀ ਹੈ। ਕਹਿਣ ਵਾਲੇ ਦਾ ਹਿੱਤ ਉਹਦਾ ਹੋ ਗਿਆ ਉਹਨੇ ਤਾਂ ਦੱਸਿਆ ਵੀ ਮੈਂ ਇਹਦੇ ਨਾਲ ਕਾਬੂ ਬਣ ਗਿਆ ਠੋਡਾ ਬਣ ਚੁ ਮੇਰੀ ਬਿਮਾਰੀ ਚਲੀ ਗਈ ਤੁਹਾਡੀ ਚਲੀ ਗਈ। ਉਹਦਾ ਵੀ ਕੋਈ ਹੈਗਾ ਲੈਣ ਦੇਣੇ ਨੇ। ਦੱਤੂ ਵਾਲੇ ਦਾ ਕੋਈ ਲੈਣ ਦੇਣ ਨਹੀਂ। ਹਾਂਜੀ। ਗੁਰਮੁਖੀ ਜਿਨ੍ਹਾਂ ਸ਼ਬਦ ਮਨ ਵਸੈ ਦਰਗਾ ਮੋਖ ਦਵਾਰ ਨਾਨਕ ਆਪੇ ਮੇਲ ਲਐ ਆਪੇ ਬਖਸ਼ਣ ਹਾਰ ਗੁਰਮੁਖੀ ਜਿਨ੍ਹਾਂ ਸ਼ਬਦ ਮਨ ਵਸੈ ਜਿਹਨਾਂ ਦੇ ਸ਼ਬਦ ਕੋਲ ਦੇ ਵਿੱਚ ਜਿਹਨ ਨੇ ਵਸਾ ਲਿਆ ਕੋਈ ਬਾਣੀ ਗੁਰਦੀ ਗੁਰਮੁਖ ਨੇ ਉਹ ਬੁੱਧੀ ਗੁਰਮੁਖੀ ਹੈ ਦਰਗਾਹ ਦਾ ਮੁਖ ਦਵਾਰ ਜਨ ਮੁਖ ਦੇ ਦਵਾਰ ਗਿਆ ਅੰਤਰੀ ਉਹਨਾਂ ਦਰਗਾਹ ਦਾ ਅਧ੍ਰਈਆ ਸੰਘ ਘੱਟ ਦੇ ਬਾਹਰ ਹੈ ਦਰਗਾਹ ਮਤਲਬ ਦਰ ਫੜਲੇ ਆਉਣਾ ਨਹੀਂ ਅਸਲ ਦੇ ਵੀ ਦਵਾਰਾ ਮਨ ਲੜ ਲਈ ਦਰਗਾਹ ਹੈ ਲਫਜ਼ ਹੈ ਮੁਕਤ ਦਾ ਦਵਾਰਾ ਉਹਨਾਂ ਨੇ ਫੜ ਲਿਆ ਜਾਤੇ ਦਵਾਰੇ ਤੇ ਕਹਿ ਪਏ ਨਾਨਕ ਗਰੀਬ ਠਹਿ ਪਿਆ ਦਵਾਰੇ ਉਹ ਦਰਗਾਹ ਦਰਗਾਹ ਹੈ ਲਫਜ਼ ਦਾ ਅਲੱਗ ਹੈ ਲੱਗ ਹੈ ਨਾਨਕ ਆਪੇ ਮੇਲ ਲੈ ਉਹ ਵੇਲਣਾ ਤੋਂ ਨਹੀਂ ਆਪੇ ਇਹ ਚਾਹਤੇ ਜੇ ਢੇਹਰੂ ਤੋਂ ਨਹੀਂ ਆਪੇ ਚਾਹ ਕੇ ਵੇਲਣ ਵੇਲ ਲੈ ਆਪੇ ਬਖਸ਼ਣ ਵਾਰ ਉਹ ਗਲਤੀਆਂ ਜਿਹੜੀਆਂ ਸੀ ਬਹੁਤ ਗਲਤੀਆਂ ਕੀਤੀਆਂ ਨੇ ਕੋਈ ਦੋਸ਼ ਨਹੀਂ ਹੈ ਔਗਣ ਮੇਰੇ ਮੈਂ ਔਗਣ ਇਹ ਤਾਂ ਨਹੀਂ ਦੋਸ਼ ਉਹਦਾ ਤਾਂ ਗਲਤੀ ਕੋਈ ਵੀ ਨਹੀਂ ਸੀ ਕੁੱਤੀ ਕਹਿੰਦੀ ਗਲਤੀ ਤਾਂ ਸਾਰੀ ਮੇਰੀ ਹੈ ਉਹ ਬਖਸ਼ਣ ਹੈ ਉਹਦਾ ਗੁਲ ਜਿਹੜਾ ਉਹਦੇ ਦੌਰੇ ਚੱਲਿਆ ਗਿਆ ਉਹ ਸਾਰੀ ਮੋਤੀ ਦਰ ਜਿ ਤਾਰदाई ਦੀ ਗੁਣ ਔਗਣ ਤੇ ਤਾਰੇ ਕੋਈ ਤੋ ਜੀ ਮਹੱਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨ ਬਿੰਦ ਤਿਸਿਉ ਕਿਉ ਮਨ ਕਿ ਜਿਹਨੇ ਤਾਂ ਘੜੀ ਵੀ ਨਹੀਂ ਸਾਡਾ ਸਰਦਾ ਜੀ ਹੁਣ ਦਾ ਘੜੀ ਦਜੀ ਹੁਣ ਆਪਣੇ ਅੰਦਰ ਲਈ ਦੀ ਗੱਲ ਹੈ ਜਿੱਥੇ ਸਾਰੇ ਨੰਦੋਂ ਨੂੰ ਇੱਕ ਸਕਿਲਟ ਵਾਸਤੇ ਇੱਕ ਬਿੰਦ ਵਾਸਤੇ ਵੀ ਜੀ ਸਰਦਾ ਛੜ ਸਕਦਾ ਸਾਡਾ ਉਹ ਵਿਚਰ ਕੇ ਇਸ ਨੂੰ ਕਿਉਂ ਮਨ ਰੁਸੀਏ ਮਨੁੱਖੋਂ ਜਦ ਆਇਆ ਤੂੰ ਰੁਸੀਆ ਅੰਦਰੋਂ ਦੀ ਆਵਾਜ਼ ਨੇ ਰੁਸੀਆ ਫਿਰਦਾ ਤੂੰ ਇਹ ਐਸ ਤੇ ਰੰਗ ਬੋਲ ਦੇ ਰਾਮ ਨਾਲੇ ਰੁਕਿਆ ਫਿਰਦਾ ਹੈ ਤੂੰ ਦੂਸਰੀ ਹੈ ਜਿਵੇਂ ہماری ਚਿੰਤਾ ਕਿ ਤੂੰ ਸਾਡੀ ਹਰ ਵਕਤ ਚਿੰਤਾ ਹੈ ਸਾਹ ਕੋ ਲੈ ਰਹੇ ਹੈ ਸਾਡੀ ਚਿੰਤਾ ਜਿਹਨੂੰ ਹੈ ਸਰਬ ਦੀ ਚਿੰਤਾ ਜਿਸਮਨ ਭਾਵੇ ਸਾਹ ਲੈਣੇ ਘਟ ਜੀ ਕੋਈ ਹੈ ਰਾਮ ਉਹਦਾ ਇੱਕੋ ਹੀ ਸੁਭਾਅ ਕਰਕੇ ਇਤ ਜਿਹਨੂੰ ਸਾਡੀ ਚਿੰਤਾ ਹੋਵੇ महला चौथा, सावन आया ਵੀ ਉਹਦੇ ਨਾਲ ਰੁੱਸੀਏ नाम ਅਕਲ ਦੀ ਗੱਲ ਨਹੀਂ ਐ ਹਾਂਜੀ ਮਹੱਲਾ ਚੌਥਾ ਸਾਵਣ ਆਇਆ ਚਿਮਚਮਾ ਹਰ ਗੁਰਮੁਖੀ ਨਾਮ ਤੇ ਆਏ ਦੁੱਖ ਭੁੱਖ ਕਾੜਾ ਜਦੋਂ ਸਾਉਣ ਆਇਆ ਪੈਣਾ ਥੋੜਾ ਥੋੜਾ ਥੋੜਾ ਛਿਪਕੇ ਬੀਜੀ ਕੋਈ ਕੜੀਆਂ ਪੈਣ ਲੱਗੀਆਂ ਜਦੋਂ ਸ਼ਬਦ ਪ੍ਰਗਟ ਹੋਇਆ ਅੰਦਰੋਂ ਜਿੱਤੋਂ ਜਸੋਜੀ ਆਉਣ ਦਾ ਵੀ ਅੰਦਰ ਥੋੜ੍ਹੀ ਥੋੜੀ ਛਿਪਚਿਪੀ ਜੀ ਹੈ ਹਰ ਗੁਰਮੁਖ ਨਾਮ ਤੇ ਆਏ ਉਹ ਤਾਂ ਜੁੜ ਗਿਆ ਗੁਰਮੁਖ ਉਹ ਤਾਂ ਅੰਦਰੋਂ ਦਰਨ ਜੋ ਕੀ ਬਿਓ ਤਾਂ ਗੱਲ ਗੁੱਜਣ ਵਾਲੀ ਬਾਰੇ ਹਰ ਗੁੱਜਣੀ ਸ਼ੁਰੂ ਥੋੜੀ ਥੋੜੀ ਥੋੜੀ ਤੋਂ ਉੱਜਣੀ ਆ ਸ਼ੁਰੂ ਹੁੰਦੀ ਐ ਉਹ ਗੱਲ ਹੋਰ ਐ ਜੋ ਸਮਝਣੀ ਐ ਗੱਲ ਉਹ ਲੋਕ ਫੁਕ ਕਾਲਾ ਸਭ ਚੁਕਾਈ ਸੀ ਉਹ ਜਿਹੜਾ ਮਰ ਭਾਇਆ ਦੀ ਭੁੱਖ ਐ ਉਹਦੇ ਕਰਕੇ ਜਿਹੜੇ ਦੁੱਖ ਨੇ ਬਾਹਰ ਜਾਰੀ ਦੁੱਖ ਨੇ ਕਾਲਾ ਜਿਹੜਾ ਹੈਗਾ ਕਿਸੇ ਦੇ ਉੱਤੇ ਡਿਪੈਂਡੈਂਸੀ ਉੱਤੇ ਜਿਹਨੇ ਅਸੀਂ ਡਿਪੈਂਡ ਹੁੰਦੇ ਆ ਕਿਤੇ ਕਿੰਤਾ ਹੈਲੋ ਇਸ ਤਰ੍ਹਾਂ ਮੁਕੀ ਕੋਈ ਕੰਤਾ ਨਹੀਂ ਦਾ ਕੋਈ ਕੁਝ ਨਹੀਂ ਰਿਹਾ ਤਾਂ ਕਾਇਤੀ ਵੀ ਬੁੱਠਾ ਛੈਬਨ ਲਾਏ ਜਲ ਛੈਬਨ ਲਾ ਕੇ ਜਿਆਦਾ ਸੋਜੀ ਆਉਣ ਲੱਗ ਜਾਂਦੀ ਹੈ ਜੇ ਕਿਸੇ ਕਿੱਟ ਵਿੱਚ ਜਿੱਦਾਂ ਧਿਆਨ ਚੱਲਦਾ ਸੋਜੀ ਸੋਜੀ ਸੋਜੀ ਸੋਜੀ ਚਲੀ ਜਾਂਦੀ ਹੈ ਛੈਬ ਉਹਨੂੰ ਕਹਿੰਦੇ ਵੀ ਬੁੱਠਾ ਛੈਬਨ ਲਾਏ ਤੇ ਛੈਬਨ ਲਾ ਕੇ ਬੁੱਠਾ ਜੋਰ ਨਾਲ ਆਪਾਂ ਕਹਿੰਦੇ ਬਹੁਤ ਜੋਰ ਬਾਰਿਸ਼ ਹੋਣ ਲੱਗੀ ਉਦੋਂ ਫਿਰ ਦੁੱਖ ਪਾੜਾ ਫਿਰ ਕੁਝ ਵੀ ਰਹਿਦਾ ਫਿਰ ਕੋਈ ਜਿੰਮਾ ਠੀਕ ਹੈ ਇਹ ਨਾਮ ਵਾਸਤੇ ਦੱਸਿਆ ਹਾਂ ਜੀ ਹਾਂ ਪਹਿਲੀ ਚਿਪਚਿਪੇ ਨਾਲ ਧਿਆਨ ਖਿੱਚਦਾ ਹੈ ਪਰ ਜਿਹੜੀ ਸਵਾਲ ਆਇਆ ਜਵਾਬ ਨਾਲ ਹੀ ਆ ਗਿਆ ਸਵਾਲ ਜਿਹੜਾ ਜਵਾਬ ਨਾਲ ਹੀ ਹੈ ਸਵਾਲ ਜਿਹੜਾ ਜਵਾਬ ਨਾਲ ਫਿਰ ਕੋਈ ਕਿਤਾਬਾਂ ਫੋਲਣ ਦੀ ਲੋੜ ਨਹੀਂ ਰਹਿੰਦੀ ਗੁਰੂ ਹਾਂ ਧਰਤੀ ਭਈ ਹਰਿਆਵਲੀ ਅਨ ਜੰਮਿਆ बोहल ਪਲਾਏ ਹਰ ਅਚਿੰਤ ਬੁਲਾਵੇ ਕਿਰਪਾ ਕਰ ਹਰ ਆਪੇ ਪਾਵੈ ਥਾਂ ਕੱਲ ਤਾਂ ਬਾਹਰ ਲਈ ਚਲਦੀ ਹੈ ਹੁਣ ਫਿਰ ਕੀ ਹੁੰਦਾ ਜਦ ਸਾਰੀ ਧਰਤੀ ਹਦੀ ਭਰੀ ਹੋ ਜਾਂਦੀ ਹੈ ਜਦੋਂ ਇੱਥੇ ਕੁਝ ਪੈਦਾ ਆਪਣੇ ਇਹਨੇ ਹਿਰਦਾ ਹਰਿਆ ਭਰਿਆ ਹੋ ਗਿਆ ਜਿਹਦੇ ਵੀ ਸੁਣ ਲਿਆ ਉਹਦਾ ਵੀ ਹਿਰਦਾ ਹਰਿਆ ਹੋ ਗਿਆ ਸਭ ਘਰਦ ਪਈ ਹਰਿਆ ਬਲੀ ਜਿੱਥੇ ਬੂਦ ਚਲੀ ਗਈ ਜਿਹੜੀ ਜ਼ਮੀਨ ਨੇ ਇਹ ਵੀ ਬੋਲੀ ਹੋਈ ਗੱਲ ਜਿਹਦੇ ਮਨ ਬਸਾਲੀ ਜਿਹਦੇ ਤੇ ਅਸਰ ਕਰ ਗਈ ਉਹ ਹਰਿਆਵਲੀ ਹੋ ਗਈ ਸਭ ਉਹ ਪਈ ਹਰਿਆਵਲੀ ਅਰੇ ਜਮਿਆ ਬੋੜ ਆਏ ਉਹ ਬੋੜ ਲੱਗੇ ਦੁਨੀਆਂ ਹੀ ਜਿੱਦੀ ਖੋਜਦੇ ਫਿਰਦੇ ਤੇ ਸਾਰੇ ਹੀ ਬੰਦ ਕੇ ਬੋੜ ਲੱਗੇ ਬਹੁਤ ਦੁਨੀਆਂ ਇੱਕਦਮ ਇਹ ਚੀਜ਼ ਨੂੰ ਪਤਣ ਕੇ ਇਕ ਦੰਗਵਾਹਕਾਰ ਹੋ ਗਿਆ ਉਹ ਕੋ ਗਲਤ ਆਏ ਅਸਲੀ ਅੱਜ ਜਮਿਆ ਬਹੁਤ ਲਾਇ ਬਹੁਤ ਗਿਆਨ ਅਥਿਹਰਤ ਗਿਆਨ ਇੰਨਾ ਗਿਆਨ ਜਿਹੜਾ ਮਨਸਾਈਟੀਆਂ ਸਾਰਿਆਂ ਦੇ ਅੰਦਰ ਪੈਦਾ ਹੋ ਗਿਆ ਔਰ ਜਿਹੜੀਆਂ ਪਿਛੇ ਕਿਤਾਬਾਂ ਲਿਖੀਆਂ ਹੋਈਆਂ ਤੇ ਬੋਲਦੇ ਤੇ ਮਹਾਪੁਰਸ਼ਾਂ ਨੇ ਬੋਲ ਤੀ ਉਹ ਬਿਲਕੁਲ ਆਣ ਲੱਗਣ ਲੱਗੇ ਬਸ ਕੁਝ ਹਵਾ ਕੇ ਗਏ ਜਿੱਦੀਆਂ ਮਤਾਲ ਸੀਆਂ ਸਾਰਿਆਂ ਦਾ ਹੋ ਗਿਆ ਚਗਲ ਮਤਾਲਤ ਕੇਵਲ ਹਾਲ ਨਾ ਜਦੋਂ ਆਉਂਦਾ ਤਕल्लਾਈ ਬਸ ਸਾਡੇ ਭਾਰੂ ਪੈ ਜਾਂਦਾ ਜਿਦਿਓ ਮਤਾਂ ਦੇ ਸਾਰਿਆਂ ਦਾ ਸਾਰਿਆਂ ਦਾ ਅਸਲ ਲੋਕਾਂ ਦੇ ਪਨਾ ਤੋਂ ਲਾਜ਼ਮ ਹੈ ਹਰ ਅਜੰਤ ਗੁਲਾਬੇ ਕਿਰਪਾ ਕਰੋ ਬਲਾਉਣਾ ਕਾਉਂਦੇ ਜੇ ਅਜੇ ਤੋ ਜਾਂਦਾ ਉਹ ਬੁਲਾਇਆ ਹੀ ਬੋਲਦਾ ਫਿਰ ਬੁਲਾਉਣਾ ਚ ਕਿਰਪਾ ਕਰੀ ਹਰ ਆਪੇ ਪਾਵੇ ਤਾਂ ਅੱਪੇ ਹਰ ਜਿਹੜਾ ਐਂਡੂ ਜਗਾ ਦੇ ਦਤਾ ਦੂਗੋ ਬੰਦੇ ਨੂੰ ਆਪੇ ਬਲਾਉਂਦਾ ਉਹ ਹਰ ਹੁਣ ਹਰ ਤਰ੍ਹਾਂ ਹੀ ਉਹ ਹਰੇ ਹਰ ਇੱਥੋਂ ਹਰ ਹੋ ਕੇ ਨਾ ਬਸ ਅਕਖੰਡ ਉਹ ਬਰਾਬਰ ਨੇ ਕੋਈ ਨਹੀਂ ਸਾਰੇ ਉੱਤੇ ਛੋਟਾ ਵੱਡਾ ਤਾਂ ਹੈ ਨਹੀਂ ਹਾਂ ਹਾਂ ਬਸ ਜਗਾ ਦੇਤੀ ਆਪਣੀ ਜਗਾ ਬਹਿ ਜਾ ਭਾਈ ਤੇਰੀਓ ਕੁਰਸੀ ਖਾਲੀ ਪਈ ਐ ਆ ਜਾ ਨਾਲੇ ਮਿਲ ਜਾ हरते सैं तिहावू संत जनों जो अंतै लै छड़ाए हरकीरत भक्ति आनंद है सदा सुख वसै मन आई संत जनों हर किसे तिहावू ते संत जदों जो अंतै लै छड़ाए आणा वेळे छड़ा माया चो पर जगड़ मन तों रखो ਉਹ ਕੌਣ ਹੈ ਉਹ ਤੇਰਾ ਮੂਲ ਹੈ ਉਹਨੇ ਛੜਾਉਣਾ ਹੋਰ ਕੱਢ ਕਿਸੇ ਨੇ ਛੜਾਉਣਾ ਉਹ ਆਪਣੇ ਆਪ ਨਾਲ ਜੁੜ ਜਾਂਦੇ ਜਾਂ ਛੁੱਟਣ ਆਪਣੇ ਆਪ ਵਿੱਚ ਜੁੜਦਾ ਸੰਸਾਰ ਨਾਲ ਜੁੜਿਆ ਪਿਆ ਮਨ ਬਣਾਣਾ ਜੁੜਦੇ ਨੇ ਮਨ ਕਰਕੇ ਤਾਂ ਜੁੜੇ ਨਹੀਂ ਸਕਦਾ ਮਨ ਤਾਂ ਫਿਰ ਮਨਾਂ ਦਾ ਟਕਰਾਵ ਹੀ ਹੋ ਜਾਂਦਾ ਅਸਲ ਜੋ ਮਾਇਆ ਹੀ ਦੀਦੀ ਹੈ ਸਰੀਰ ਦੀਦੀ ਹੈ ਉਹ ਰੱਖਿਆ ਹੋਰੇ ਬਣਾ ਹੀ ਬੈਠਾ ਜਦੋਂ ਕਿਸੇ ਨਾਲ ਕਰਦਾ ਤਾਂ ਉਹਦੀ ਸਰੀਰ ਦੀ ਫੋਟੋ ਦੀ ਗੱਲ ਆਉਂਦੀ ਆ ਪੂਰੇ ਮਾਇਆ ਦੀ ਗੱਲ ਆ ਪੂਰੇ ਉਹ ਮਾਇਆ ਨਾਲੇ ਹੈ ਨਾਲੇ ਤਾਂ ਨੇ ਬੋਲਦਾ ਜਿਹੜਾ ਦੇਖਿਆ ਉਹੀ ਕੁਝ ਹੈ ਨਾ ਉਹ ਤਾਂ ਅੱਲਾਹ ਦਾ ਨੇ ਉਹਦੇ ਦੀਨਾ ਹੀ ਦੀ ਹਰ ਕਿਸੇ ਤੇ ਆ ਸੰਤ ਜਨ ਲੋਕ ਜੋ ਅੰਤਲੇ ਛੜਾਏ ਜਿਹੜਾ ਅੰਤ ਵੇਲੇ ਛੜਾ ਲਵੇ ਉਹਨੂੰ ਤੇ ਆ ਉਹ ਕੋਣ ਉਹ ਜਿਹੜੇ ਲੋਕ ਬਾਹਰ ਪੂਜਾ ਕਰਦੇ ਤੇ ਉਹ ਤਾਂ ਛੜਾ ਸਕਦੇ ਨਹੀਂ ਉਸ ਵੇਲੇ ਇਕ ਸਵਾਲ ਜਿਹੜਾ ਕਰ ਦੁੱਤਾ ਇੱਥੇ ਕਿ ਦੱਸੋ ਕਿਸ ਨੂੰ ਪਛਲਾਇਆ ਹੋਵੇ ਕਿਸੇ ਨੇ ਹਰਨ ਇਹ ਹਰ ਕੀਰਤੀ ਭਗਤ ਆਨੰਦ ਹੈ ਸਦਾ ਸੁਖ ਮਹਿਬੂਬ ਹੈ ਜਿਹੜੀ ਹਰ ਦੀ ਕੀਰਤੀ ਹੈ ਹਰ ਸਭ ਦੇ ਅੰਦਰ ਹੈ ਘਟ ਘਟ ਦੇ ਹਰ ਜੂਸ ਸੰਕਰਤ ਹੈ ਉਹ ਫੁਕਾਰ ਧੂਮੇ ਪਾਸ਼ਾ ਨੇ ਕੀਰਤ ਜਹੀ ਦਸੀ ਹੈ ਗੱਲ ਉਹ ਦੀ ਕੀਰਤੀ ਹਰ ਕੀਰਤੀ ਸ਼ਕਤੀ ਇਹੀ ਫਤਿਹ ਬਿਹਾਰ ਦੀ ਕੀਰਤੀ ਕਰਨੀ ਹੀ ਭਗਤੀ ਹੈ ਆਨੰਦ ਹੈ ਇਹਦੇ ਵਿੱਚ ਆਨੰਦ ਹੈ ਜ ਇਹਦੇ ਵਿੱਚੋਂ ਹੀ ਆਨੰਦ ਮਿਲਦਾ ਕੀਰਤੀ ਕਰਨ ਨਾਲ ਹੀ ਆਨੰਦ ਹੈ ਆਨੰਦ ਮਿਲਦਾ ਨਹੀਂ ਤਾਂ ਆਨੰਦ ਇੱਥੇ ਤੋਂ ਆਨੰਦ ਨੂੰ ਇੱਥੇ ਟਿੱਪੀ ਵੀ ਲਾਈ ਹੋਈ ਹੈ ਸਦਾ ਸੁਖ ਵਸਣਾ ਨਹੀਂ ਮਨ ਦੇ ਵਿੱਚ ਸਦਾ ਸੁਖ ਵਸ ਜਾਂਦਾ ਹੈ ਹਮੇਸ਼ਾ ਸੁਖ ਜਿਹੜਾ ਇਹਦਾ ਸੁਖ ਅਲਪ ਸੁਖ ਦੀ ਸਦਾ ਸੁਖ ਦੁਖ ਸਾਧਨ ਚ ਨਵਾਸ ਹੋ ਜਾਂਦਾ ਹੈ ਕਹ ਲੋ ਹੋ ਜੀ ਠੀਕ ਹੈ ਜੀ ਹਾਂ ਜੀ ਸਾਰਾ ਸੁਖ ਤਾਂ ਸੁਖ ਸਾਗਰ ਜਈ ਹੈ ਹਾਂ ਜੀ ਜਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਉ ਸੁਭਾਈ ਜਿਨਾਂ ਗੁਰਮੁਖੀ ਨਾਮ ਦੇਖੋ ਨਾਮ ਦੇ ਨਾਲ ਗੁਰਮੁਖੀ ਲਖਣ ਲੱਗੇ ਗੁਰਬਖਾਨ ਨਾਲੋਂ ਵੱਖਰਾ ਹੈ ਇਹਦਾ ਮਤਲਬ ਹੈ ਗੁਰਮੁਖਾਂ ਵਾਲਾ ਨਾਮ ਜਿਹਨਾਂ ਨੇ ਰੱデア ਗੁggenਾ ਆ ਆਰਾਧਨਾ ਕੀਤੀ ਹੈ ਗੁਰਮੁਖਾਂ ਉਹ ਕੀ ਆ ਹੁਕਮ ਦੇ ਕੋ ਨਾਮ ਹੁਕਮ ਹੈ ਜਿਨਾਂ ਨੇ ਵੀ ਗੁਰਮੁਖਾਂ ਦੇ ਜਿਹੜਾ ਲੋਕ ਦੱਸਿਆ ਉਹਦੀ ਆਰਾਧਨਾ ਉਹਦੀ ਹੁੰਦੀ ਆ ਜਦ ਜਪੜਾਂ ਦਾ ਗੁਰਬਾਣੀ ਨੂੰ ਆ ਜਪੀ ਦੀ ਆ ਗੁਰਬਾਣੀ ਸਮਝੀ ਦਾ ਗੁਰਬਾਣੀ ਤੋਂ ਕੀ ਸਮਝਿਆ ਕਿ ਉਸ ਨਾਮ ਦੀ ਆਰਾਧਨਾ ਕਰੋ ਹੁਕਮ ਦੀ ਆਰਾਧਨਾ ਕਰੋ ਆਰਾਧਨਾ ਨਾ ਬੁਝਾਰਤ ਬੁੱਝੀ ਜਾਣੀ ਉਬੁਠਾ ਸ਼ਬਦ ਲਾਇਆ ਜਿਹੜੀ ਰੱਡਿਆ ਤੇ ਨਾ ਦੁੱਖ ਭੁੱਖ ਲੈ ਜਾਏ ਉਹਨਾਂ ਦੀ ਭੁੱਖ ਜਿਹੜੀ ਮਾਇਆ ਦੀ ਹੈ ਔਰ ਸਰੀਰ ਕਰਕੇ ਜਿਹੜੇ ਦੁੱਖ ਨੇ ਸੰਸਾਰੀ ਦੁੱਖ ਨੇ ਦੋ ਹੀ ਲੈ ਖਤਮ ਹੋ ਜਾਂਦੇ ਜ્ઞાનਨਕ ਤ੍ਰਿਪਤਾ ਕਾਇ ਗੁਲ ਫਰਦਰਚੁ ਦੇਹੋ ਸੁਭਾਏ ਜਾਨਾ ਕਹਿੰਦਾ ਜਾਨ ਹਰ ਕਾ ਜਾਨਾ ਜਾਨਾ ਦਾਨ ਤਦੋਂ ਤੱਕ ਨਾਮਿਕ ਹਨ ਇਹਦਾ ਗਿਆਨ ਜਿਹਦੇ ਨੂੰ ਜਾਣ ਲਿਆ ਜਾਂਦਾ ਬੰਦਾ ਜਿਹਦੇ ਨੂੰ ਜਾਣ ਲਿਆ ਆਪਣੇ ਮੂਲ ਨੂੰ ਜਾਣ ਲਿਆ ਪਰਛਾਨ ਲਿਆ ਆਪਣੇ ਆਪ ਨੂੰ ਜਾਣ ਲਿਆ ਤ੍ਰਿਪਤਾਇ ਗਾਇ ਗੁਣ ਉਹਦੇ ਗੁਣ ਦਾ ਕਰਕੇ ਤ੍ਰਿਪਤ ਹੁੰਦਾ ਹੋਰ ਕੋਈ ਤਰੀਕਾ ਨਹੀਂ ਤ੍ਰਿਪਤ ਹੋਣ ਦਾ ਮਾਇਆ ਦੀ ਭੁੱਖ ਉਹਦੀ ਤ੍ਰਿਪਤ ਹੋਣ ਦਾ ਮਾਇਆ ਦੀ ਭੁੱਖ ਲੈ ਜਾਣੀ ਮਾਇਆ ਦੀ ਇੱਛਾ ਨਾਲ ਨਹੀਂ ਗਾਇ ਗੁਣਾ ਹਰ ਦਰਸ਼ਨ ਦੇ ਹੋ ਸੁਪਾਏ ਪਰ ਉਹ ਕੀ ਮੰਗਦਾ ਕੀ ਹੈ ਕਿ ਹਰ ਮੈਨੂੰ ਆਪਣੇ ਦਰਸ਼ਨ ਦੇ ਇਹੀ ਜੋ ਦੀ ਭਾਵਨਾ ਇਹੀ ਮੇਰੀ ਸ਼ੁਭ ਭਾਵਨਾ ਭਾਵਨਾ ਇਹੀ ਹੁੰਦੀ ਹੈ ਅੰਦਰ ਉਹਦੀ ਇਹ ਜੋ ਨੂੰ ਪਹੁੰਚਦਾ ਹੈ ਬੈਲੂ ਯਾਨੀ ਉਹ ਜਿਹੜਾ ਆਦਮੀ ਉਹਦੀ ਸ਼ੁਭ ਉਹਦੀ ਭੁੱਖ ਕੀ ਹੁੰਦੀ ਹੈ ਸੁਭਾਏ ਦਾ ਕਹਿੰਦਾ ਅੱਛੀ ਭੁੱਖ ਸ਼ੁਭ ਭਾਵਨਾ ਦਰਸ਼ਨ ਦੀ ਭਾਵਨਾ ਉਹਦੀ ਆਪਣੇ ਗੂਲ ਦੇ ਦਰਸ਼ਨ ਦੀ ਉਹ ਜਿਹੜਾ ਹੋਰ ਤਾਂ ਭੁੱਖ ਦੀ ਕਿ ਜਨ ਤੇ ਵੀ ਓਂਕੜ ਚਾਹੀਦਾ ਸੀ ਇਹਨਾਂ ਤੋਂ ਮਿਸ ਹੋਇਆ ਹੋਇਆ ਤੇ ਓਂਕੜ ਜਨ ਤੇ ਵੀ ਹੋਏਗਾ ਹਾਂ ਹਾਂਜੀ ਹਾਂ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆਂ ਗੁਰਪੂਰੇ ਦੀ ਜਿਹੜੀ ਦਾਤ ਹੈ ਉਹ ਨਿਤ ਦਿੱਤਾ ਹੈ ਅੱਜ ਦੇ ਅੱਜ ਦੇ ਇੱਕ ਕਹਾ ਸਵਾ ਹੈ ਜ ਜੇ ਇਹ जिनी ਬੁੱਧੀ ਵੱਧ ਵੱਦੀ ਜਾਂਦੀ ਹੈ ਉਹਨਾਂ ਗਿਆਨ ਵੀ ਰੋਜ਼ ਵੱਧ ਗ੍ਰਹਿਣ ਕਰਦੀ ਰਹਿੰਦੀ ਹੈ ਕਪੈਸਿਟੀ ਉਦੀ ਗਿਆਨ ਸੁਭਜਣ ਦੀ ਵਾਧ ਹੀ ਰਹਿੰਦੀ ਹੈ ਹਾਂਜੀ ਤੂੰ ਦੇਵੇਂ ਆਪ ਤਿਆਲ ਨਾ ਛਪੇ ਛਪਾਇਆ ਚਲੋ ਖੁਸ਼ ਹੋ ਕੇ ਦੱਦਾ ਅੰਦਰੋਂ ਪਰ ਜੋ ਛਪਾਇਆ ਸੁਭਨਾ ਉਹ ਛਪਾਇਆ ਨਹੀਂ ਜਾ ਸਕਦਾ ਜਦ ਪਾਇਆ ਤੇ ਨਹੀਂ ਛਪਾਇਆ ਵਾਲੀ ਹਰਦਾ ਕਮਲ ਪ੍ਰਕਾਸ਼ ਉਨਮਨੀ ਲਿਵ ਲਾਇਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਇਆ ਪ੍ਰਕਾਸ਼ ਹੁੰਦਾ ਉਨਮਨ ਨਾਲ ਲਿਵ ਲਾਇਆ ਬਾਂਝੜਾ ਤੋਂ ਪਲਟਿਆ ਹੋਇਆ ਹੁੰਦਾ ਉਲਮਨ ਜੇ ਉਤਾ ਮਾਇਆ ਤੋਂ ਪਲਟ ਜਾਂਦਾ ਜਮਨ ਉਲਮਨ ਹੋ ਜਾਂਦਾ ਮਾਇਆ ਦੇ ਵਿੱਚ ਉਹਦਾ ਅਸੀ ਰੂਦਬੁੱਦ ਕਹਿੰਦੇ ਨੇ ਉਹਨੂੰ ਮਾਇਆ ਵਿੱਚ ਉਹਦਾ ਜਿਹੜਾ ਮਾਇਆ ਹੈ ਵਿਚਨ ਆਇਆ ਨੇ ਵਾਇਆ ਨਾ ਕੋਈ ਲਗਾਓ ਦੀ ਫੁਰਮਤ ਜੇ ਕੋ ਕਰੇ ਉਸ ਦੀ ਰੀਤ ਸਰਚਾਈ ਪਾਇਆ ਜਿਹੜਾ ਉਹਦੀ ਰੀਤ ਕਰੇ ਨਾ ਕੋਈ ਕਰਦੇ ਸੀ ਰੀਤ ਉਹਨੂੰ ਪ੍ਰਚਾਰ ਕਰਦੇ ਸੀ ਸਾਈਡ ਤੇ ਜੇ ਉਹਦੀ ਕੋਈ ਰੀਤ ਕਰੇ ਉਹਦੇ ਸਰਚਾਈ ਉਹ ਪਾਣੀ ਆ ਸੋਏ ਪੰਡੀਆਂ ਕੋਈ ਰੀਤ ਨਹੀਂ ਕੀਤੀ ਜਾ ਸਕਦੀ ਹਾਂਜੀ ਨਾਨਕ ਅਪੜ ਹੋਏ ਨਾ ਸੱਕਈ ਵਡਿਆਈਆਂ ਨਾਨਕਾਂ ਦਾ ਕੋਈ ਨਹੀਂ ਆਦਮੀ ਜਿਹੜਾ ਹੈ ਆਪਣੀ ਬੁੱਧੀ ਦੇ ਲੈਵਲ ਤੇ ਨਹੀਂ ਇਹਨੂੰ ਕੋਲ ਸੰਗਦਾ ਲਿਖ ਸਕਦਾ ਇਹਨਾਂ ਗੱਲਾਂ ਨੂੰ ਇਹ ਗੁਰਬਾਣੀ ਨਹੀਂ ਲਿਖੀ ਜਾ ਸਕਦੀ ਸੰਸਾਰੀ ਬੁੱਧੀ ਦੇ ਲੈਵਲ ਤੇ ਜਿਹੜਾ ਕੋਈ ਰੀਡ ਕਰਦਾ ਉਹ ਆਪਣੀ ਬੁੱਧੀ ਦੇ ਲੈਵਲ ਤੇ ਰੀਡ ਕਰਦਾ ਹੈ ਇਹ ਪੂਰੇ ਸਤਿਗੁਰ ਦੀ ਵਡਿਆਈ ਹੈ ਜਿਹੜੀ ਇਹਦੀ ਆਦਮੀ ਦੀ ਬੁੱਧੀ ਤੇ ਪਰੇ ਦੀ ਗੱਲ ਹੈ ਇਹ ਕਰਕੇ ਉਹ ਉਹ ਬਾਦ ਦੇ ਵਿੱਚ ਪ੍ਰੋਜੈਕਟਡ ਹੋ ਜਾਣੇ ਪ੍ਰਚਾਰ ਕਰਦੇ ਰਹੇ ਨੇ ਸਾਈਡ ਤੇ ਉਦਾਸੀ ਵੀ ਕਰਦੇ ਰਹੇ ਜੀ ਕੁਰਬਾਨੀ ਦਾ ਹੀ ਫੁਰਬੀ ਕਰਦੇ ਜੀ ਪਰ ਉਹ ਗੱਲ ਹੋਣਾ ਤੇ ਨਹੀਂ ਬਣੀ ਜੀ ਜੰਤ ਤੇ ਜਿਹੜੀ ਗੁਰੂ ਅੰਗਦ ਦੇਵ ਤੇ ਬਣ ਗਈ ਕਰਦੇ ਰਹੇ ਨੇ ਬਾਦ ਦੇ ਵਿੱਚ ਵੀ ਕਰਦੇ ਰਹੇ ਨੇ ਸਾਰੇ ਨਹੀਂ ਗੱਲ ਬਣੀ ਠੀਕ ਹੈ ਸਤਗੁਰੂ ਦੀ ਵਡਿਆਈ ਦੇ ਬਰਾਬਰ ਪਹੁੰਚਣਾ ਮੁਸ਼ਕਲ ਹੈ ਮੁਸ਼ਕਲ ਹੈ ਇੱਥੇ 34ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂਜੀ